ਫੇਰ ਉੱਥੇ ਹੀ ਆ ਗਈ ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਤੇ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਏਗੇ ਮਿੱਟੀ ਆਕਾਸ਼ ਵਿੱਚ ਉੱਡ ਕੇ ਚਪੋਛ ਜਾਂਦੀ ਹੈ ਤਰਕੀ ਤੋੜ ਕੇ ਧਰਤੀ ਨਾਲ ਵੱਖ ਹੋ ਗਏ ਇਹਨੂੰ ਲੋਕੀ ਕਹਿੰਦੇ ਰਹੇ ਆ ਗਈ ਹੈ ਅਧੇਰੀ ਨਹੀਂ ਹੈ ਤੇ ਮਿੱਟੀ ਉੱਡ ਕੇ ਚੜੀ ਹੋਈ ਹੈ ਹਵਾ ਦੀ ਸੰਗਤ ਕਰਕੇ ਆਕਾਸ਼ ਵਿੱਚ ਚਲੇ ਗਏ ਹੋਇਆ ਕਿ ਜਦੋਂ ਹਵਾ ਸਮਾਪਤ ਹੋਈ ਤੇ ਇਹ ਮਿੱਟੀ ਸਾਰੀ ਫੇਰ ਆਣ ਕੇ ਤੇ ਮਿੱਟੀ ਵਿੱਚ ਲੱਗ ਗਈ ਲੀਨ ਹੋ ਗਈ ਫੇਰ ਮਿੱਟੀ ਵਿੱਚ ਹੀ ਲੀਨਤਾ ਹੈ ਮਿੱਟੀ ਵਿੱਚੋਂ ਉਭਰ ਕੇ ਫੇਰ ਮਿੱਟੀ ਵਿੱਚ ਲੀਨਤਾ ਹੈ ਚਰ ਕਲਗੀ ਤਰ ਪਾਤਸ਼ਾਹ ਕੰਗਲ ਬਸ ਇਹ ਸhetra ਇਹਨਾਂ ਸਾਰੀ ਮਰਜਾਦਾ ਇਹ ਲੀਨਤਾ ਹੋ ਰਹੀ ਹੈ ਜੈਸੇ ਇੱਕ ਨਦ ਤੇ ਤੰਗ ਕੋਠ ਉਪਜਿਤ ਹੈ ਪਾਣ ਕੇ ਤਰੰਗ ਸਰ ਪਾਣ ਹੀ ਕਹਾਏਗੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਅਲੇਕਾ ਤਰੰਗ ਤੇ ਲਹਿਰ ਉੱਠਦੀਆਂ ਨੇ ਇਹਨਾਂ ਦੇ ਨਾਮ ਵੱਖ-ਵੱਖ ਨੇ ਹੈ ਚਲਦਾ ਹੀ ਰੂਪ ਹੈ ਜਲ ਹੀ ਕੋਈ ਹੈ ਹੈ ਤੇ ਜਲ ਹੀ ਹੈ ਸਾਰੇ ਦੇ ਚਾਰ ਨਾਮ ਹੋ ਗਏ ਜਲ ਤਰੰਗ ਅਲ ਫੇਨ ਬੁਧ ਜਲ ਤੇ ਪਰ ਹੋਈ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੁਣਨ ਕੋ ਦੂਜਾ ਬਸ ਐਵੇਂ ਵੇਖਣ ਵਾਸਤੇ ਕਹਿਣ ਵਾਸਤੇ ਦੋ ਨੇ ਹੈ ਜਾਲਿਓ ਸਾਰਾ ਸਮਾਰਜ ਕਰ ਰਿਹਾ ਸਭ ਪਾਤਸ਼ਾਹ ਕੰਧਰੇ ਖਾਕ ਸੇ ਉਬਰੀ ਖਾਕ ਤੇ ਗਿਰ ਪਰੀ ਤੋਂ ਖਾਕ ਐਵੇਂ ਨਾਂ ਨਹੀਂ ਵੱਖਰਾ ਬਣਿਆ ਸੀ ਨਾਂ ਨਹੀਂ ਵੱਖਰਾ ਬਣਿਆ ਸੀ ਭਈ ਇਹ ਅਧੇਰੀ ਹੈ ਵੱਖਰੀ ਹੋਈ ਹੈ ਸਭ ਲੀਨ ਹੋ ਰਹੀ ਹੈ ਇਹ ਸਾਰੀ ਲੀਨਤਾ ਹੈ ਸੰਸਾਰ ਵਿੱਚ ਜੋ ਮਿੱਟੀ ਵਿੱਚੋਂ ਬਣਿਆ ਸਭ ਮਿੱਟੀ ਵਿੱਚ ਸਮਾਏਗਾ ਅੱਜ ਮਾਟੀ ਮਾਟੀ ਹੋਈ ਏਕ ਦੋ ਮਿੱਟੀਆਂ ਸੇ ਇੱਕ ਤੇ ਧਰਤੀ ਮਿੱਟੀ ਤੇ ਇੱਕ ਉਸ ਮਿੱਟੀ ਦਾ ਨਾਮ ਸੀ ਜਿਹਨੂੰ ਅਸੀਂ ਕਹਿੰਦੇ ਸਾਂ ਖਜਾਨ ਸਿੰਘ ਜੀ ਇਹ ਵੀ ਮਿੱਟੀ ਸੀ ਅੱਜ ਦੋਵੇਂ ਇੱਕ ਹੋ ਗਈਆਂ ਕੋਈ ਪਹਿਚਾਣ ਨਹੀਂ ਸਕਦਾ ਕਿੱਥੇ ਐ ਖਜਾਨ ਸਿੰਘ ਵਾਲੀ ਮਿੱਟੀ ਬਸ ਲੀਨਤਾ ਹੋ ਗਈ ਨਾ ਇਹਦਾ ਗਾਥਾ ਹੈ ਲੀਨਤਾ ਮੱਟੀ ਮੱਟੀ ਹੋਈ ਇੱਕ ਦੋਵੇਂ ਇੱਕ ਹੋ ਗਈਆਂ ਕਿਸੇ ਮਹਾਪੁਰਸ਼ ਨੇ ਲਿਖਿਆ ਮੱਟੀ ਸੇ ਮੱਟੀ ਬਣੀ ਮੱਟੀ ਤੇ ਅਸਵਾਰ ਤੇ ਅੱਜ ਕੀ ਹੋਇਆ ਕਈ ਦਰਿਆ ਜਮਾਤੀ ਸੇ ਮਾਤੀ ਰੋਈ ਦਾ ਛੁੱਤੇ ਬੰਕ ਦਵਾਰ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਜੀ ਜਿੰਨਾ ਜੇ ਚਿਰ ਹੁਕਮ ਹੈ ਕਿ ਜਿੰਨਾ ਚਿਰ ਨਿਤਨੇਮ ਦੀ ਅਰਦਾਸ ਨਹੀਂ ਹੁੰਦੀ ਉਹਨਾਂ ਚਿਰ ਆਪੋ ਆਪਣੇ ਥਾਂ ਤੇ ਸਾਧ ਸੰਗਤ ਬੈਠੀ ਰੇ ਮੱਥਾ ਲਾ ਟੇਕੇ ਕੋਈ ਮੈਂ ਅਰਜ਼ ਕਰ ਰਿਹਾ ਸਾ ਸਾਬਕਾ ਲਗੀ ਤੇ ਪਾਤਸ਼ਾਹ ਕਹਿੰਦੇ ਨੇ ਸਾਰੀ ਲੀਨਤਾ ਹੋ ਰਹੀ ਹੈ ਜਿਸ ਦਾ ਨਾਮ ਖਿਦਾਨ ਸਿੰਘ ਉਸ ਮਿੱਟੀ ਦਾ ਨਾਮ ਨਿਸ਼ਾਨ ਕੋਈ ਪਛਾਣ ਨਹੀਂ ਸਕਦਾ ਕਿੱਥੇ ਹੈ ਲੀਨਤਾ ਹੋ ਗਈ ਜਿਵੇਂ ਇੱਕ ਪੂਰਤ ਹੈ ਧੂਰ ਕੇ ਕਨੂਕਾ ਫਿਰ ਧੂਰ ਹੀ ਸਦਾ ਤਰ੍ਹਾਂ ਸਭ ਹੈ ਸਭ ਪਰਿਵਰਤਨ ਤਬਦੀਲ ਹੋ ਰਿਹਾ ਨਾ ਕੋਈ ਉਹ ਭਗਤ ਪੀਪਾ ਜੀ ਕਹਿੰਦੇ ਨੇ ਨਾ ਆਏ ਬੋ ਨਾ ਕੋਈ ਜਾਏ ਬੋ ਰਾਮ ਕੀ ਦੁਹਾਈ ਐਸਾ ਹੈ ਨਾ ਕੋਈ ਆਉਣਾ ਜਾਣਾ ਜੰਮਣਾ ਮਰਨਾ ਇੱਕ ਬਥਰੀ ਗੱਲ ਹੈ ਇਥੇ ਸੰਸਾਰ ਦੀ ਮਰਜ਼ਾਦਾ ਹੈ ਪਰ ਮਰਨਾ ਸ਼ਬਦ ਗੁਰਸਿੱਖਵਾਸ ਤੇ ਗੁਰਬਾਣੀ ਵਿੱਚ ਨਹੀਂ ਵਰਤਿਆ ਗਿਆ ਕਿਉਂਕਿ ਗੁਰੂ ਸਾਹਿਬ ਆਪ ਨਹੀਂ ਮੰਨਦੇ ਗੁਰੂ ਨਾਨਕ ਪਾਤਸ਼ਾਹ ਇੱਥੇ ਸੋ ਕਰਤਾਰ ਪਰਬ੍ਰਧ ਅਵਸਥਾ ਹੈ ਪੁੱਛਿਆ ਮਹਾਰਾਜ ਇਹ ਤੁਸੀਂ ਹੁਣ ਕੋਈ ਅਗਲੇ ਪਾਸੇ ਦੀ ਕੋਈ ਗੱਲ ਦੱਸੋ ਇਹ ਸੰਸਾਰ ਦੀ ਮਰਜ਼ਾ ਕਿਸ ਤਰ੍ਹਾਂ ਵਰਤੇਗੀ ਤੇ ਤੁਸੀਂ ਆਪਣਾ ਹਾਰ ਦੱਸੋ ਤੇ ਗੁਰੂ ਨਾਨਕ ਪਾਤਸ਼ਾਹ ਸ੍ਰੀ ਰਾਜ ਵਿੱਚ ਕਹਿੰਦੇ ਨੇ ਕਹਿੰਦੇ ਨੇ ਜਿੰਨੂੰ ਤੁਸੀਂ ਦੁਨੀਆ ਮਰਨਾ ਕਹਿੰਦੀ ਹੈ ਮੈਂ ਉਹਨੂੰ ਮਰਨਾ ਦੀ ਮੈਨੂੰ ਕੋਈ ਚਿੰਤਾ ਨਹੀਂ ਪਾਤਸ਼ਾਹ ਕਹਿੰਦੇ ਨੇ ਆਜੀ ਮਰਨੇ ਕੀ ਚਿੰਤਾ ਨਹੀਂ ਜੀਵਣ ਕੀ ਦਹਿਆ ਅਛਾ ਕਹਿੰਦੇ ਨੇ ਮਰਨੇ ਕੀ ਮੈਨੂੰ ਕੋਈ ਚਿੰਤਾ ਨਹੀਂ ਤੁਹਾਡੀ ਚਿੰਤਾ ਮਿੱਠੀ ਕਿਵੇਂ ਹੈ ਕਿ ਇਧਰ ਇਹ ਸੁਆਸਤੇ ਕੇ ਜੀਵਨ ਕੀ ਨਿਆਸ ਜੀਵਨ ਦੀ ਆਸ ਘਟ ਜਾਏ ਤੇ ਮਰਨ ਦਾ ਡਰ ਘਟ ਜਾਂਦਾ ਹੈ ਜੀਵਨ ਦੀ ਆਸ ਵੱਜੇ ਡਰ ਵੱਜ ਜਾਏਗਾ ਕਬੀਰ ਕਹਿੰਦੇ ਗੁਰਬਾਣੀ ਵਿੱਚ ਕਹਿੰਦੇ ਨੇ ਡੱਡਾ ਡਰ ਉਪਜੇ ਡਰ ਜਾਈ ਡੱਡੇ ਅਖਰ ਤੋਂ ਉਪਦੇਸ਼ ਹੈ ਕਬੀਰ ਕਹਿੰਦੇ ਗੁਰਮਖੋ ਜੇ ਕਿਤੇ ਅਕਾਲ ਪੁਰਖ ਦਾ ਡਰ ਹਿਰਦੇ ਵਿੱਚ ਵਸ ਜਾਏ ਤੇ ਮੌਤ ਦਾ ਜਮਾ ਦਾ ਡਰ ਨਿਕਲ ਜਾਂਦਾ ਹੈ ਇਹ ਜਾਂਦਾ ਕਿੱਥੇ ਹੈ ਕਹਿੰਦੇ ਨੇ ਜਾਂਦਾ ਨਹੀਂ ਕਿਤੇ ਵੀ ਤਾਂ ਡਰ ਵਿੱਚ ਡਰ ਰਿਹਾ ਸਮਾਈ ਉਸੇ ਡਰ ਵਿੱਚ ਹੀ ਉਹ ਲੀਨ ਹੋ ਜਾਂਦਾ ਗੱਲ ਲੀਨਤਾ ਦੀ ਸਭ ਲੀਨ ਹੋ ਰਿਹਾ ਕਮਰੇ ਵਿੱਚ ਹਨੇਰਾ ਹੋਵੇ ਬੱਤੀ ਜਗਾ ਦਿਓ ਉਸੇ ਵੇਲੇ ਕਿੱਥੇ ਚਲੇ ਜਾਂਦਾ ਜਾਂਦਾ ਕਿੱਥੇ ਹੈ ਬਸ ਉੱਥੇ ਦਿੱਥਾਂ ਵਿੱਚ ਹੀ ਬੱਤੀ ਬੁਝਾ ਦਿਓ ਫਿਰ ਉੱਥੇ ਹੀ ਹੈ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਕਹਿੰਦੇ ਤੇਜ ਜਿਉਂ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਦਾ ਤਾਹੀ ਮੈਂ ਸਮਾਏਗੇ ਜਿਸ ਤਰ੍ਹਾਂ ਪ੍ਰਕਾਸ਼ ਵਿੱਚ ਅંધੇਰਾ ਸਮਾ ਜਾਂਦਾ ਜਿਸ ਤਰ੍ਹਾਂ ਅਧੇਰੇ ਵਿੱਚ ਪ੍ਰਕਾਸ਼ ਸਮਾ ਜਾਂਦਾ ਬਸ ਇਸੇ ਤਰ੍ਹਾਂ ਹੀ ਸੰਸਾਰ ਦੀ ਸਭ ਤਰਦੀਲੀ ਹੋ ਰਹੀ ਹੈ ਇਹ ਸਾਰਾ ਪਰਿਵਰਤਨ ਹੈ ਇਸੇ ਤਰ੍ਹਾਂ ਹੀ ਲੀਨਤਾ ਹੋ ਰਹੀ ਹੈ ਸੰਸਾਰ ਵਿੱਚ ਕੋਈ ਆਰਿਆ ਕੋਈ ਯਾਰੀ ਕਉ ਮੈਂ ਅਰਜ ਕਰ ਰਿਹਾ ਸਾ ਗੁਰੂ ਕੇ ਚਰਨਾਂ ਵਿੱਚ ਰਹਿਣ ਵਾਲਾ ਗੁਰਸਿੱਖ ਇਸ ਨੇ ਮੌਤ ਦਾ ਡਰ ਨਹੀਂ ਮੰਨਿਆ ਤਾਂ ਤੇ ਕਬੀਰ ਕਹਿੰਦੇ ਨੇ ਅਬ ਕੈਸੇ ਮਰੋ ਭਾਈ ਨੰਦ ਲਾਲ ਦਾਦਾ ਪ੍ਰਮਾਨ ਕਈ ਵਾਰੀ ਦਿੱਤਾ ਹੈ ਬੈਠੇ ਸਣ ਪੁੱਛਿਆ ਭਾਈ ਜੀ ਤੁਸੀਂ ਦੱਸੋ ਅਗਾ ਜਿੱਥੇ ਤੁਸੀਂ ਜਾਣਾ ਉਹ ਤੁਹਾਨੂੰ ਕਿਹੋ ਲੱਗ ਰਿਹਾ ਭਾਈ ਨੰਦ ਲਾਲ ਕਹਿੰਦੇ ਨੇ ਕਹਿੰਦੇ ਨੇ ਮਰਾ ਦਰ ਮੰਝਲੇ ਜਾਣਾ ਹੋਵੇ ਐਸੋ ਹਮੇਸ਼ਾ ਦੀ ਜਰਸਬੇ ਹੁਦਾ ਦੇ ਨਾਲਦ ਕੁਝਾ ਬੰਦੇ ਮਹਿਮਲ ਹਾ ਕਹਿੰਦਾ ਜਿੱਥੇ ਜਾਣਾ ਇਸ ਰਸਤੇ ਵਿੱਚ ਮੈਨੂੰ ਖੁਸ਼ੀਆਂ ਹੀ ਖੁਸ਼ੀਆਂ ਦਿਸ ਰੀਆਂ ਨੇ ਖੁਸ਼ੀਆਂ ਦਿਸ ਰੀਆਂ ਨੇ ਭਈ ਤੈਨੂੰ ਖੁਸ਼ੀਆਂ ਕਿਵੇਂ ਦਿਸ ਦਿਸ ਨੇ ਲੋਕੀ ਤੇ ਚਿੰਤਾਤ ਹੋ ਜਾਂਦੇ ਉਦਾਸ ਹੋ ਜਾਂਦੇ ਨੇ ਦਰਦੇ ਨੇ ਕਹਿੰਦਾ ਇਸ ਵਾਸਤੇ ਖੁਸ਼ੀਆਂ ਨੇ ਖੁਦਾ ਹਾਜ਼ਰ ਬਵਤ ਤਾਇਮ ਬਬਿੰਗੀਦਾਰ ਪਾਕ ਸ਼ਰਾ ਨਾ ਗਿਰਦਾਬੇ ਦਰੋ ਹਾਇਲ ਨਾ ਦਰਿਆਉ ਨਾ ਸਾਹਿਲ ਹਾ ਨਾ ਕੋਈ ਇਸ ਰਸਤੇ ਵਿੱਚ ਖੁਦਾ ਦੇ ਦਰਸ਼ਨ ਹੋਣਗੇ ਆਤਮਾ ਤੇ ਪਰਮਾਤਮਾ ਦਾ ਮਿਲਾਟ ਹੈ ਮੇਰੇ ਸਤਿਗੁਰੂ ਦੀ ਮੇਰੇ ਤੇ ਇੰਨੀ ਕਿਰਪਾ ਹੋਈ ਹੈ ਹੁਣ ਮੇਰੇ ਵਿੱਚੋਂ ਮੌਤ ਦਾ ਡਰ ਨਿਕਲ ਗਿਆ ਹੋਇਆ ਮੈਂ ਕੋਈ ਉਠਾ ਤੇ ਕਚਾਵੇ ਨਹੀਂ ਲੱਦਣੇ ਮੈਂ ਤਿਆਰ ਬੈਠਾ ਹਰ ਵਕਤ ਤਿਆਰ ਜਦੋਂ ਹੁਕਮ ਆ ਗਿਆ ਉਸੇ ਵੇਲੇ ਤਿਆਰ ਇਸ ਵਾਸਤੇ ਕਬੀਰ ਕਹਿੰਦੇ ਨੇ ਕਿ ਇੰਦਰ ਅਬ ਕੈਸੇ ਮਰੋ ਮਰਨ ਮੰਨ万ਿਆ ਹੁਣ ਮੈਨੂੰ ਇਹ ਸਮਝ ਆ ਗਈ ਆ ਕਿ ਮਰਨਾ ਹੈ ਕੀ ਜਦੋਂ ਜਾਣਕਾਰੀ ਹੋ ਗਈ ਤੇ ਮਰਨ ਦਾ ਡਰ ਮੁੱਕ ਗਿਆ ਮੈਂ ਅਰਜ ਕਰ ਰਿਹਾ ਸਾ ਤੇ ਜਿੰਨਾ ਕੋ ਸਿੱਖਾ ਲੈ ਮਰਨ ਤੋਂ ਨਹੀਂ ਡਰੇ ਉਹਨਾਂ ਨੇ ਫਾਸੀਆਂ ਦੇ ਰਸੇ ਕਾਲ ਵਿੱਚ ਪਾ ਲਏ ਆਪਣੇ ਆਪ ਗੱਜ ਕੇ ਤੋਪਾਂ ਦੇ ਸਾਹਮਣੇ ਖਲੋ ਖਲੋਗੇ ਵਰਜਨ ਤੋਂ ਵੀ ਪਿੱਛੇ ਨਹੀਂ ਹਟੇ ਸਰਦਾਰ ਬਰਿਆਮ ਸਿੰਘ ਸਾਹਮਣੇ ਆ ਕੇ ਖਲੋਤਾ ਤੋਪ ਦੇ ਅੰਗਰੇਜ਼ ਨੇ ਆਖਿਆ ਤੈਨੂੰ ਰਹਾ ਕਰ ਦਿੰਦੇ ਆ ਸਰੀਰ ਕਦਮਦਰੇ ਚਰਾਇਆ ਹੈ ਉਹ ਹੈ ਭਈ ਗੱਲ ਤੇ ਏਸੀ ਪਈਏ ਨੂੰ ਛੱਡਣਾ ਕੱਢਣੇ ਵਿੱਚੋਂ ਇਹਨਾਂ ਦੇ ਇਹ ਗੱਲ ਸੀ ਉਹਨਾਂ ਆਖਿਆ ਮੈਂ ਤੇ ਸਵਾਸਤਿਆ ਆਇਆ ਹੀ ਨੇ ਜਿਹੜਾ ਤੇਰੇ ਅੱਗੇ ਮਸਲਾ ਆਇਆ ਉਹ ਮੈਂ ਮਸਲਾ ਹੱਲ ਕਰ ਦੇਣਾ ਸਰਦਾਰ ਬਰਿਆਮ ਸਿੰਘ ਕਹਿੰਦਾ ਮੈਂ ਵਤਨ ਦਾ ਸਿਪਾਈ ਹਾਂ ਤੇ ਵਤਨ ਖਾਤਰ ਲੜਾਂਗਾ ਦੁਨੀਆ ਦੇ ਸਾਹਮਣੇ ਵਤਨ ਤੋਂ ਹਾਸਾ ਹੱਸ ਕੇ ਸੂਲੀ ਚੜਾਗਾ ਏ ਵਤਨ ਮੇਰਾ ਵਤਨ ਹੈ ਤੇ ਵਤਨ ਮੇਰੀ jaan ਹੈ ਇਸ ਵਤਨ ਦੀ ਮੈਂ ਸ਼ਮ੍ਹਾ ਤੇ ਪਰਵਾਨਾ ਬਣ ਕੇ ਸੜਾਂਗਾ ਮੈਂ ਤੇਰੇ ਆਖੇ ਮੌਤ ਤੋਂ ਨਹੀਂ ਡਰਨਾ ਮੈਂ ਤੇਰੇ ਆਖੇ ਘਰ ਨੂੰ ਨਹੀਂ ਜਾਣਾ ਮੈਂ ਤੇ ਮੇਰਾ ਤੇ ਤਰੀਕਾ ਹੋਣਾ ਕਹਿੰਦਾ ਮੈਂ ਰਣ ਭੂਮੀ ਵਿੱਚ ਮੌਤ ਵੇਖ ਕੇ ਭੱਜਣ ਵਾਲਾ ਵੀਰ ਨਹੀਂ ਮੈਂ ਸੱਚਾ ਵਤਨ ਸਿਪਾਹੀ ਹਾਂ ਕੋਈ ਕਾਇਰ ਦੀ ਤਸਵੀਰ ਨਹੀਂ ਮੈਂ ਪਾਣੀ ਵਾਗਰ ਖੂਨ ਨੂੰ ਝੱਟ ਲੋਹੜਾ ਵਿੱਚ ਮੈਂ ਦੇ ਡਟ ਜਾਵਾ ਵਾਂ ਚਟਾਨ ਦੇ ਮੇਰਾ ਕੰਬਿਆ ਕਦੇ ਸਰੀਰ ਨਹੀਂ ਬੈਤ ਇਸ ਤਰ੍ਹਾਂ ਮੈਂ ਤੇ ਮੌਤ ਤੋਂ ਕਦੀ ਡਰਿਆ ਹੀ ਨਹੀਂ ਮੈਨੂੰ ਮੌਤ ਤੇ ਬਹੁਤ ਦਿਸਤੀ ਨਹੀਂ ਇਸ ਵਾਸਤੇ ਜੇ ਐਸਾ ਹੋਇਆ ਤੇ ਮਾਲਿਆਂ ਦੀਆਂ ਇੱਕ ਫੁੱਟ ਉੱਚੀ ਥੜੀ ਬਣਾ ਕੇ ਉੱਚਾ ਹੋ ਕੇ ਖਲੋਟਾ ਸਾਹਮਣੇ ਮੌਤ ਪਰ ਮੌਤ ਨੂੰ ਤੇ ਬਹੁਤ ਬੰਨਿਆ ਹੀ ਨਹੀਂ ਨਾ ਇਹਨਾਂ ਨੇ ਇੱਥੇ ਨਰਕਾਂ ਤੋਂ ਡਰਦੇ ਨਹੀਂ ਸੁਰਗਾ ਤੇ ਮਰਦੇ ਨਹੀਂ ਐਸ਼ਾ ਦੇ ਆਸ਼ਕ ਨਹੀਂ ਮਾਇਆ ਦੇ ਵਰਦੇ ਨਹੀਂ ਰੇਤਾਂ ਵਿੱਚ ਨਹਾਉਣਾ ਪਏ ਨੀਂਹਾਂ ਵਿੱਚ ਆਉਣਾ ਪਏ ਆਰੇ ਨਾਲ ਚਿਰਨਾ ਪਏ ਨਦੀਆਂ ਵਿੱਚ ਹੜਨਾ ਪਏ ਤੋਪਾਂ ਨਾਲ ਉੱਡਣਾ ਪਏ ਫਾਂਸੀ ਤੇ ਚੜਨਾ ਪਏ ਕੋਈ ਛੁਰੀ ਚਲਾ ਦੇਵੇ ਪਸਤੌਲ ਚਲਾ ਦੇਵੇ ਧੋਖੇ ਨਾਲ ਕੋ ਦੇਵੇ ਲੜਨਾ ਪਏ ਲਿਖਣਾ ਪਏ ਵੇਲਾ ਫਿਰ ਤੱਕਦੇ ਨਹੀਂ ਕਿਸੇ ਦੀ ਜਮੋਤ ਮਰੇ ਜਿੰਦਾ ਰਹਿ ਸਕਦੇ ਨਹੀਂ ਇੱਥੇ ਗੱਲਾਂ ਹੀ ਹੋ ਰਹਿ ਇਹ ਜੀਵਨ ਹੋਰ ਇੱਥੇ ਆਣ ਕੇ ਕਹਿ ਦਿੱਤਾ ਕਿ ਮੈਨੂੰ ਮੌਤ ਤੋਂ ਡਰ ਨਹੀਂ ਲੱਗਦੀ